ਫੋਨ ਉਪਦੇਸ਼ سے ਸਮਝੇ ਆਪ ਆਪੇ ਰਚਿਆ ਸਭ ਕੇ ਹਿਸਾਬ ਹੁਣ ਸਭ ਕੋ ਆਪੇ ਆਤ ਹੈ ਇਹ ਕੁਛ ਨਹੀਂ ਹੈ ਹੋਰ ਆਪ ਉਪਦੇਸ਼ ਸੁਝੇ ਆਪ ਆਪਣੇ ਕਰ ਆਪੇ ਰਚਿਆ ਸਭ ਕੇ ਹਿਸਾਬ ਆਪਣੇ ਆਪ ਨੂੰ ਆਪੇ ਉਪਦੇਸ਼ ਕਰਦਾ ਹੈ ਸੁਣ ਲੈਂਦਾ ਜੇ ਬਾਹਰ ਸੁਣ ਲੈਂਦਾ ਜਿੰਨਾ ਜਰ ਆਪਣੇ ਆਪ ਨੂੰ ਆਪ ਉਪਦੇਸ਼ ਨਹੀਂ ਕਰਦਾ ਮਨ ਮੰਨਦਾ ਹੀ ਨਹੀਂ ਮਨ ਨੂੰ ਬਣਾਉਣ ਵਾਲੇ ਉਹੀ ਉਪਦੇਸ਼ ਜੇ ਬਾਰ ਨੂੰ ਸੁਣੇ ਦੇਣਾ ਪੈਂਦਾ ਉਸ ਵੇਲੇ ਤਾਂ ਆਪੇ ਉਪਦੇਸ਼ ਆਪੇ ਸੁਣਨਾ ਜਦ ਜ਼ਮਾਨ ਮੰਨਤਾ ਮਨ ਨੂੰ ਬਣਾਉਣਾ ਪੈਂਦਾ ਤਾਂ ਆਪੇ ਉਪਦੇਸ਼ ਕਰਦੀ ਹੈ ਉਹ ਆਪੇ ਮੁੜ। ਮਨ ਸਮਝੇ। ਇਹ ਮਨ ਵੱਡਾ ਕਿ ਜਾਸਿਓ ਮਨ ਮੰਨਿਆ। ਕੋਣ ਆਪ ਹੁੰਦੇ ਸਿਰ ਤੇ। ਉਹ ਇੱਕ ਹੱਥ ਦੂਏ ਹੱਥ ਨੂੰ ਤੋਹ। ਤੇ ਹੱਥ ਮਾਇੜਾ ਤੇ ਦੂਏ ਦੀ ਬੱਦਨ ਵਾਲੇ ਤੋਤਾ ਜਾਊਗਾ। ਸਭਨਾਂ ਲਾ ਕੇ ਗੱਲ ਜੀ ਹੋਈ। ਇਹ ਦੂਆ ਕੌਣ ਹੈ? ਉਹ ਇੱਕ ਖਬਾਤ ਦਾ ਜਹਜਾ ਤੇਰਾ ਹੀ ਹੈ ਜੇ ਜਹਜਾ اتنا ਖਬਾਤ ਹੋਤਾ ਤਾਂ ਫਿਰ ਕਿਸੇ ਨੇ ਤੋਟਾ ਇਹਦੇ ਨਾਲ ਤਾਂ ਤੋਟਦਾ ਸਹੀ ਆ ਟੋਲਾ ਐਂ ਤੋ ਇਹਦਾ ਤੋਟਦਾ ਤਾਇਆ ਹ ਚ ਉਪਦੇਸ਼ ਹੋਈ ਹੈ ਜਿਹੜਾ ਆਪਣੇ ਆਪ ਨੂੰ ਆਪ ਦਬੇ ਸੁਣਾ ਹੋਇਆ ਉਪਦੇਸ਼ ਤਾਂ ਦਾ ਜਿਹੜਾ ਹੈਗਾ ਨਾ ਅਸਰ ਇਧਰ ਕਹਿੰਦੇ ਸੁਣੀ ਇਧਰ ਕੱਢ ਤੀ ਉਹ ਸੁਣਿਆ ਹੋਇਆ ਇੱਕ ਵਾਰ ਸੁਣ ਲੈ ਦੁਬਾਰਾ ਜੇ ਤਾਂ ਰਿਪੀਟ ਨਹੀਂ ਕਰਨਾ ਤਾਂ ਇਦਰ ਸੁਣੇ ਤਾਂ ਨਿਕਲ ਜਾ ਦੁਬਾਰਾ ਤਾਂ ਵਿਚਾਰ ਨਹੀਂ ਕੀਤੇ ਅਪਨ ਇਹਦਾ ਬਲਾਈ ਤੇ ਸੁਣਾ ਇਧਰ ਕੱਢ ਜਿਹੜੀ ਗੱਲ ਸੁਣ ਕੇ ਇੰਦਰ ਆਪਾਂ ਰਿੜਕੀ ਜਾਂਦੇ ਹਾਂ ਰਿੜਕੀ ਜਾਂਦੇ ਹਾਂ ਉਹ ਫਿਰ ਉੱਥੇ ਆਪ ਸੁਪਦੇਸ਼ੇ ਸਮਝਿਆ ਸਮਝਿਆ ਤਾਂ ਐ ਗੱਲ ਟੀਚਰ ਨੇ ਬਾਕੀ ਦੇ ਨੇ ਪਤਾ ਨਹੀਂ ਕਈ ਵਾਰ ਆ ਦੀ ਗੱਲ ਸੁਣ ਕੇ ਪਾਸ ਹੋ ਸਕਦਾ ਹੋ 95% ਦੇ ਆ ਸਕਦਾ ਹਾਂ ਇੱਥੇ ਤਾਂ 70% ਦੀ ਗੱਲ ਤੇ 70% ਨੰਬਰ ਚਾਹੀਦੇ ਨੇ आप ਉਪਦੇਸ਼ ਸੁਝੇ ਆਪਨੇ ਕਿ ਮੈਂ ਲੇ ਜੂਗਾ ਵੀ ਇਹ ਤਾਂ ਮਾਨੂੰ ਆਪੇ ਇੱਕ ਵਾਰ ਸੁਣ ਲੈਣੀ ਆ ਨਾਲੇ ਵਰਪੇ ਨਾਮ ਜਪਿਆ ਇੱਕ ਵਾਰ ਉਹਦਾ ਇੱਕ ਵਾਰ ਅਸੀਂ ਸੁਣ ਲਈ ਉਹਦੀ ਤਾਂ ਹੀ ਗੱਲ ਆਉਂਦੀ ਆ ਨਾ ਪੜਨ ਵੱਜਾ ਤਰ ਪੰਡਵ ਉਹ ਤੇ ਚਲੇ ਪੜਨ ਨੱਦਦੇ ਨੇ ਤਾਂ ਉਹ ਸ਼ਸਤਰ ਵਿਦਿਆ ਬਾਰੇ ਜ਼ਿਕਾਇਤ ਹੋ ਗਿਆ ਜੀ ਅਚਾਰੀਆ ਹੋ ਉਹ ਐਕਾ ਵੀ ਸਦਾ ਸੱਚ ਬੋਲੋ ਆਪਰਾ ਇਹਾ ਹੁੰਦੇ ਆ ਜੇ ਪਹਿਲਾਂ ਪਹਿਲੇ ਜਦੋਂ ਨੇ ਪਹਿਲਾਂ ਤਾਂ ਉਸਾਇਆ ਹੋ ਕੁਝ ਅਖਰਾਂ ਦੀ ਪਛਾਣ ਅਖਰਾਂ ਦੀ ਪਛਾਣ ਤੋਂ ਪਹਿਲਾਂ ਸਬੋਤ ਨਹੀਂ ਅਖਰਾਂ ਦੀ ਆ ਪਛਾਣ ਆ ਗਈ ਸੱਚੇ ਵੋਹ ਐ ਲਿਖਣਾ ਇਫੇ ਅੱਖਰ ਦੇ ਉਹ ਰਸਤੇ ਫੇਰ ਉਹਨੇ ਜਦ ਪਹਿਲਾ ਪੰਕਤੀ ਵੀ ਕੁਛ ਕੁਝ ਗਿਆਨ ਦੀ ਚੋ ਮਿਲਦਾ ਸਦਾ ਸੱਚ ਬੋਲੋ ਜਵਾਗੇ ਜਿਵਨ ਹਾਵੈ ਤੇ ਉਹ ਪਾਠ ਲੈ ਕੇ ਤਸੋ ਸਮਝੇ ਤਨੇ ਹਾਂ ਸਮਝੇ ਇਹ ਦਸ ਕਹਾਣੀ ਮੈਨੇ ਸਮਝੇ ਅਨੰਦ ਜੀ ਉਹਦੇ ਸੁਣਨਾ ਕਿ ਵਾਹ ਪੜੇ ਕਹਾਣਾ ਜੇ ਮੇਰਾ ਬਾੜ ਪੱਕਾ ਨਹੀਂ ਹੋਵੇ ਅਜਾ ਮੈਂ ਝੂਠ ਬੋਲਦਾ ਕਿ ਤਦ ਨਾਲ ਸੱਚ ਬੋਲਣ ਤੇ ਮেরি ਆਦਤ ਬਣ ਜੂ ਆਪੋ ਦੇਸੇ ਸਮਝੇ ਆਪੇ ਰਜਿਆ ਸਭ ਆਪੇ ਰਜਿਆ ਸਭ ਦੇ ਸਾਥ ਇਹ ਆਪ ਆਪਣੇ ਆਪ ਨੂੰ ਕੋਈ ਨਹੀਂ ਬਤਾ ਸਕਦਾ ਇਹਨੂੰ ਜਦੋਂ ਆਪ ਆਪਣੇ ਆਪ ਨੂੰ ਵਿਧੈਦਾ ਉਸੇ ਤਰ੍ਹਾਂ ਕਿਹਾ ਆਪਣੇ ਹੱਥੀਂ ਆਪਣਾ ਆਪਣੇ ਹੀ ਸਵਾਰੀਏ ਆਪਣੇ ਮਨ ਨੂੰ ਆਪੇ ਬਣਾਈਦਾ ਆਪਣੇ ਮਨ ਨੂੰ ਆਪ ਉਪਦੇਸ਼ੀ ਤਾਂ ਕੋਈ ਤਾਂ ਤੁਹਾਨੂੰ ਇੱਕ ਵਾਰ ਉਪਦੇਸ਼ ਦੇຊੂ ਕਹਿ ਗਿਆ ਲਓ ਫਿਰ ਤੁਹਾਡੀ ਜ਼ਿੰਮੇਵਾਰੀ ਹੈ ਮਨ ਬਣਾਉਣਾ ਉਹਦੇ ਤੇ ਸੁਣੀ ਹੋਈ ਗੱਲ ਤੇ ਜਿਹੜਾ ਇਹ ਨਹੀਂ ਕਰਦਾ ਉਹਦੇ ਵਾਸਤੇ ਤੁਹਾਨੂੰ ਕੋਈ ਚੀਜ਼ ਨਹੀਂ ਮਿਲਦੀ ਜਿਹੜਾ ਇਹ ਕਰਦਾ ਨਹੀਂ ਉਹ ਤੁਹਾਨੂੰ ਕਹਦਾ ਹੁੰਦਾ ਇਹ ਨਹੀਂ ਧਰਮ ਤਾਂ ਇੱਥੋਂ ਹੀ ਸ਼ੁਰੂ ਹੁੰਦਾ ਹੈ ਜੋ ਸੁਣਿਆ ਉਹ ਬੰਨਣਾ ਤੇ ਬੰਨਿਆ ਤਾਂ ਬੰਦ ਨਹੀਂ ਹੈ ਬੰਨਿਆ ਤਾਂ ਮੈਂ ਨਹੀਂ ਮੰਨਦਾ ਮਤਲਬ ਬਣਾਓ ਜੇ ਬੰਨਿਆ ਮਾਣਿਆ ਮਾਣਿਆ ਤੇ ਜਿੱਤੀਏ ਜੇ ਤਬਦੀਲੀ ਨਹੀਂ ਆਈ ਤਾਂ ਬੰਦੇ ਨੇ ਜਿੰਨਾ ਕਹਿੰਦੇ ਨੇ ਤੂੰ ਦੂਸਰ ਨੂੰ ਆ ਗਈ ਉਹਨੂੰ ਬੁਲਾਓ ਪਹਿਲਾਂ ਕਹਾਂ ਦਾ ਪਾਠ ਜਸਨਾ ਉਹ ਸਾਰੀ ਜ਼ਿੰਦਗੀ ਉਹ ਕਹਿੰਦਾ ਜੀ ਉਸਟਰ ਬੰਦ ਹੋਰ ਉਹ ਪਾਠ ਦੀ ਬਖਵਾਏ ਜੇ ਤੂੰ ਮੈਂ ਉਹਦਾ ਨਾਂ ਲੱਗਿਆ ਜੇ ਸੱਚਾ ਆਦਮੀ ਉਸਟਰ ਬਣਿਆ ਕੋ ਸਾਰੀ ਜ਼ਿੰਦਗੀ ਉਹਨੇ ਇਹੀ ਪੱਕਾ ਕੀਤਾ ਵੀ ਸੱਚ ਬੋਲਣਾ। ਜੋ ਮੁੱਦਤੀ ਇੱਕ ਵਾਰ ਜੱਪ ਲਿਆ ਸਮਝ ਲੈ ਸੱਚ ਬੋਲ ਫੇਰ ਤਾਂ ਬੋਲਣਾ ਹੈ ਉਹ ਤਾਂ ਪ੍ਰੈਕਟੀਕਲ ਹੋਣਾ ਹੈ। بار ਕੀ ਪੜ੍ਹੋ ਮੁੰਨੇ ਨੂੰ ਪ੍ਰੈਕਟੀਕਲ ਹੈ। بار ਪੜ੍ਹਨਾ ਮਤਲਬ ਕੀ ਰਹਿ ਗਿਆ। ਉਹ ਕਹਿੰਦਾ ਹਾਂ ਤਾਂ ਮੈਂ ਜਲ੍ਹ ਪੜ੍ਹੂੰਗਾ ਇਹ ਪੱਕਾ ਕਰ। ਉਹਦੇ ਤੇ ਤਾਂ ਅਸਰ ਪੈ ਗਿਆ ਕੁਝ पहले سب کدائی جوے تے کچھ पे پیڑ پڑھ بہت لیا اثر کچھ بھی نہیں پڑھی بانی بہت ہا جی پڑھ تے پاٹھ بہت کر دے اثر کا کچھ نہیں کیوں سننی زیادہ مندی کچھ نہیں منھر دا ارادہ بھی ہے جی سننا فائدہ بھی کوئی ہے جے منھر دا ارادہ کوئی نہیں تے سننا فائدہ بھی کوئی نہیں ہاں سننا فائدہ تکٹ ٹر نو تھانج ਕੋਈ ਗੱਲ ਨਹੀਂ ਅੱਗੇ ਜਾ ਕੇ ਤੁਸੀਂ ਬਿਆਨ ਨਹੀਂ ਬਦਲ ਸਕਦੇ ਵੀ ਇਹ ਸਾਨੂੰ ਨਹੀਂ ਪਤਾ ਲੱਗਿਆ। ਕੇ ਨਹੀਂ ਆਏ? ਕਿੰਨੀ ਵਾਰ ਪੜ੍ਹਿਆ? ਤੁਸੀਂ? ਕੇ ਸੁਣ ਕੇ। ਬੇਮਤਲਬ। ਛੜ ਤੋਂ ਪਾਣੀ ਪਾੜਨ ਦੂਰ ਹੋ ਤੇ ਜੇ ਬਚਣੇਗਾ ਹਾਂ। ਛੱਡ ਕੇ ਬਾਜੋ। ਬਚਣ ਨੂੰ ਭੱਜੋ ਨਹੀਂ ਵਰਜੋਗੇ। ਐਵੇਂ ਬੇਮਤਲਬ। छत उपर ऊपर चोर या फड़या जावे सन्न hmm. hmm. दे ऊपर ही चोर फड़या जावे फिर जवाब की दूँगा अभी मैं छोड़ी नहीं की थी उस्त्री का रोज पढ़दे हो मते प्रचार करदे हो मुद्दे है नहीं थोड़े वाला हां जी आपको प्रदेश से समझे आप आपे रहजा सबके साथ आपे आप रहजा सबके साथ ਸਾਰਿਆਂ ਦੇ ਸਾਹਦੇ ਉਹ ਇੱਕੋ ਹੀ ਰੱਤਿਆ ਹੋਇਆ ਹੈ ਉਹ ਸਾਰਿਆਂ ਨਾਲ ਇਹੀ ਗੱਲ ਹੈ ਸਾਰਿਆਂ ਵਿੱਚ है ਜੋਤ ਹੈ ਸਾਰਿਆਂ ਚ ਤੇ ਜਿਵੇਂ ਜਮਾ ਕੇ ਬਥੇ ਸਮਸਤੇ ਇੱਕ ਜੋਤ ਹੈ ਵੱਡ ਹੈ ਨ ਘਾਟ ਹੈ ਨ ਘਾਟ ਵੱਡ ਹੋਤ ਹੈ ਜੋਤ ਹੈ ਇੱਕੋ ਯਸ ਤੇ ਚੰਦ ਸਭ ਹੈ ਕੋਈ ਸਫਰ ਹੈ ਕੋਈ ਜਗਾ ਜਾਣਾ ਕੋਈ ਘਰ ਜਾਣਾ ਹੈ ਕੋਈ ਬਵਾਰੀ ਹੈ ਸਾਰਿਆਂ ਦੀ ਕੋਈ ਦੁਆਈ ਹੈ ਸਾਰਿਆਂ ਦੀ ਹਰਕਤ ਕਿਥੇ ਹੈ ਹਾਂਜੀ ਆਪ ਕਿਨੋਂ ਆਪਨ ਕਿਥੋਂ ਆ ਜੀਵੇ ਜਿਆ ਸਾਧੂ ਜੀ ਜੀਵਨ ਮਤਿਆ ਕੋਈ ਜਿੰਗਰੇ ਦੋਹੇ ਰਜਿਆ ਸਭ ਦੇ ਸਾਥ ਜੀਵੇਂ ਆਪ ਉਪਦੇਸ਼ ਇਹਦਾ ਮਤਲਬ ਇਹ ਹੈ ਵੀ ਕਾਨੂੰਨੀ ਉਪਦੇਸ਼ ਹੈਗਾ ਆਪ ਇੱਕ ਆਕਾਦੀ ਬਾਸ ਨਹੀਂ ਹੈ ਸਭ ਆਤੇ ਉਪਦੇਸ਼ ਉਹ ਜੇ ਆਪ ਆਵੇ ਲੱਭ ਜੀਰੋ ਆਪ ਇੱਕ ਵਾਸਤੇ ਹੁਣ ਆਪ ਇੱਕ ਵਜਨ ਨਾ ਲੱਭ ਸਵਾਲ आप कौन है ਆਇਆ ਸਵਾਲ ਇਹ ਇਹ ਡਿਵੀਜ਼ਨ ਆ ਗਿਆ ਆਪ ਡਿਵੀਜ਼ਨ आप ਆਪ ਆ ਗਿਆ ਇਹ ਆ ਫਿਰ ਜਿਆ ਹੋਇਆ ਸਾਰਿਆਂ ਦੇ ਨਾਲ ਇਹ ਸਾਰਿਆਂ ਨੂੰ ਉਪਦੇਸ਼ ਹੈ ੱਲੇ ਰੂਹੀ ਹੈ ਇਹ ਜੀਵ ਸਾਰਿਆਂ ਦੇ ਵਿੱਚੋਂ ਜਿਹਨੂੰ ਆਪ ਕੇ ਹੈ ਜਿਹਨੂੰ ਆਪ ਗਿਆ ਇਹ ਸਾਰਿਆਂ ਦੇ ਵਿੱਚ ਹੀ ਹੈ ਇਹ ਨਹੀਂ ਉਪਦੇਸ਼ ਸਾਰਿਆਂ ਨੂੰ ਹੈ। ਚੋ ਮੰਨਣਾ ਕੋ ਸੱਚ ਹੈ। ਆਪ ਕਿਨੋ ਆਪਣਾ ਵਿਸਤਾਰ ਸਭ ਕਿਸ ਉਸ ਦਾ ਉਹ ਕਰਨੇ ਨਾਲ। ਹਾਂ। ਆਪ ਕੀਤਾ। ਉਹ ਕਾਹਦਾ ਕੀਤਾ ਉਹ ਵਧਾ ਲਿਆ। ਲੋਭ ਵਧਾ ਲਿਆ ਇਥੇ ਵਿਸਤਾਰ ਕਰ ਲੈਣਾ ਦੂਰ ਤੱਕ ਫੈਲ ਗਿਆ। ਆਪਸਾਂ ਪਾਗੀਆਂ ਰਿਸ਼ਤਦਾਰੀਆਂ ਪਾਗੀਆਂ ਦੁਸ਼ਮਣੀਆਂ ਵੀ ਪਾ ਲਈ। तोनियां में पालियां बिछोनियां की पालियां बोदे बन्दा दूर तक बना ले जो पैसा आदमी कीता है चाहे थोड़ा कीता चाहे ज्यादा कीता ना आ तो कीता वो बिसारों इकट्ठा ही तो करना जे ज्यादा दूर तक फैलजू जमान रात कटनी है एक रोज इकट्ठा ही तो करना कोऊंगा ਉਹ ਤਾਂ ਸੈਂਕੜੇ ਹਜ਼ਾਰਾਂ ਬਿਸਤਰੇ ਕੋਲ ਤੇ ਰੱਖ ਲੈ ਚਾਹੀਦਾ ਤੁਹਾਨੂੰ ਇੱਥੇ ਰਾਤ ਨੂੰ ਘਟਨੀ ਸਾਰੇ ਦੂਜੇ ਨੂੰ ਇਕੱਠੇ ਹੀ ਕਰਨਾ ਹੈ ਹਾਂ ਜੀ ਆਪ ਆਪ ਕਿਨੋਂ ਅਪਣ ਸਭ ਕੁਝ ਉਸ ਉਸਕਾ ਉਹ ਕਰਨੇ ਹਾਂ ਜਦ ਕਿ ਸਭ ਕੁਝ ਉਸ ਸਾਕੋ ਪਰ ਬੇਚਰਦਾ ਉਹ ਕਾਰਨੇ ਹਾਰੇ ਬਣਾਇਆ ਹੋਣਾ ਤੂੰ ਕਬਜ਼ੇ ਕਰੀਂ ਬਸ ਨਾ ਉਦੋਂ ਤੱਕ ਸਾਰਾ ਕੁਝ ਕਹਿੰਦਾ ਸਾਰੇ ਸ਼ਹਿਰਾਂ 'ਚ ਆਪਣੀਆਂ ਕੋਠੀਆਂ ਬਸਾਰ ਹੈ ਆਪਣਾ ਕੈਨੇਡਾ ਜਾ ਕੇ ਇਹਨੇ ਫਾਰਮ ਨੇ ਬਸਾਰ ਹੈ ਜੋੜਦਾ ਆਹ ਕਰਦੇ ਹੀ ਨੇ ਬੜੇ ਆਦਮੀ ਜਦੋਂ ਛੋਟਿਆਂ ਨੇ ਛੱਡੋ ਬੜੇ ਦਾ ਕਰਦੇ ਹੀ ਨੇ ਬਿਸਾਰ ਇਹਦੇ ਪਿੱਛੇ ਕਰਨੇ ਹਰ ਦਾ ਤੁੰ ਕੀ ਜੇ ਨੇ ਨਸਰ ਕੀਤਾ ਹਾਂ ਕਰਨੇ ਹਰ ਹੈ ਇੱਛਾ ਹੈ ਦੀ ਹੈ ਅਦਰ ਕਰ ਲੈ ਤੇ ਦੁੱਖ ਦੁਖੇ ਨਾ ਹੋਣਾ ਵਿਸਾਰਨ ਦੁਖੇ ਹੋਏ ਸਾਹੇ ਦਾ ਕਿਹਾ ਨਾ ਤੈਨੂੰ ਬਸਾਲ ਤੀਹੇ ਰੋਸੀ ਜਿਹਦਾ ਹੈ ਉਹ ਚੀਜ਼ ਉੱਥੇ ਰਹਿਣੀ ਆ ਤੂੰ ਮੈਂ ਬਾੜ ਲਈ ਮੇਰਾ ਵੀ ਬਾੜ ਲਈ ਤਾਂ ਜਿਹੜੀ ਉੱਥੇ ਫੇਰਦੀ ਉਹ ਬਾੜ ਲਈ ਨਾਲ ਲਾ ਲੀਏ ਤੇ ਜੋੜ ਲਈ ਉਹ ਤੈਨੂੰ ਦੁਖੀ ਕਰੂਗੀ ਜਿਵੇਂ ਮੰਨ ਲਿਆ ਵੀ ਬਰੀਏ ਉਹ ਜਿਹੜੇ ਮੋਦੇ ਵੰਨਣ ਮੰਨ ਲੈਣਾ ਸਾਰੇ ਉਹਨਾਂ ਦੀ ਗੱਲ ਹੈ ਕਿ ਕੀਤਾ ਜਿੱਥੇ ਜਿੱਥੇ ਬਿਸਾਰਾ ਸਾਰੇ ਉੱਥੇ ਜੰਨੀ ਰੋ ਟਾੜੇ ਲੱਗੇ ਐਵੇਂ ਮੇਰੀ ਐਵੇਂ ਮੇਰੀ ਐਵੇਂ ਮੇਰੀ ਉਹਦੇ ਅੰਦਰ ਚਿੱਤਾਂ ਵੀ ਰਹਦੀ ਹੈ ਉੱਥੇ ਐ ਹੋ ਗਿਆ ਉੱਥੇ ਐ ਹੋ ਗਿਆ ਉੱਥੇ ਐ ਹੋ ਗਿਆ ਕਨੈਕਸ਼ਨ ਹੋ ਗਿਆ ਹੁਣ ਉਹ ਉੱਥੇ ਇਕੱਠਾ ਕਲਨਾ ਦੀ ਸੁਰਤ ਖਿੰਡੀ ਹੋਈ ਨੂੰ ਕੱਟੀ ਕਰਦਾ ਵਿਸਾਰ ਆਹ ਕਹਿਣਾ ਕੱਲਾ ਦੋਈ ਗਾ ਨੇੜੇ ਕਮ ਕੱਲਿਆ ਹੋਰ ਫਲਾ ਲਿਆ ਦੂਰ ਤੱਕ ਉਲਟਾ ਗੱਬ ਗੱਲਿਆ ਆਏ ਉਹ ਅਨੰਦਾਦਾ ਸ੍ਰੀ ਜੀ ਪੈਨ ਕਹੋ ਕਿਛ ਪਹਿਲਾਂ ਹੀ ਜਦੋਂ ਪਹਿਚਾਨਾ ਅਜਾ ਹੋਰ ਬਹੁਤ ਅਸੇ ਵੱਡੀ ਜਾਂਦਾ ਵਿਸਤਾਰ ਹੋ ਹੀ ਜਾਵੇ ਕਨੈਕਸ਼ਨ ਆ ਰਖੋ ਲੈਣਾ ਵਿਸਤਾਰ ਹੁੰਦਾ ਉਹਦੇ ਕਿ ਨਿਕਲਦੇ ਆਪੀ ਨੂੰ ਜੰਦ ਨਹੀਂ ਇਹ ਨਹੀਂ ਜਿਆਦਾ ਸੀ ਵਿਸਤਾਰ ਕਰਦੇ ਆ ਤਾਂ ਕਿ ਨੁੜਦਾ ਕਿ ਵਿਸਤਾਰ ਆਪੇ ਹੋਵੇ ਫਿਰ ਜੁੜਦਾ ਹੋਰ ਸੇ ਜੇ ਸਾਡੀ ਇੱਛਾ ਹੈ ਵਿਸਤਾਰ ਕਰੀ ਤਾਂ ਕੁਝ ਸਾਡੀ ਇੱਛਾ ਨਹੀਂ ਨਾ ਵਿਸਤਾਰ ਜੁੜ ਜਾਂਦਾ ਹੋ ਗਿਆ ਫੇਰ ਗੱਲ ਇੱਛਾ ਤੇ ਖੜਾ ਦਿੱਤਾ ਇੱਛਾ ਤੇ ਖੜਾ ਦਿੱਤਾ ਕਿ ਜੇ ਮੁਗਿਆ ਤਾਂ ਮੈਂ ਮੇਰਾ ਦੁਰਗਿਆ ਨਾਲ ਨਹੀਂ ਜੋ ਬਰਿਸ਼ੀਨ ਦੀ ਗੱਲ ਹੈ ਤੇ ਹੈ ਇਹ ਅਖਰਾਲ ਉਹ ਰਿਸ਼ੀਆ ਰਿਸ਼ੀਆ ਤਾਂ ਹੋ ਗਿਆ ਗੁਰੂ ਦਾ ਜੀਵਨ ਜਦੋਂ ਨਿਲੰਝ ਜਦੇ ਪਿੰਡਾਂ ਦੇ ਪਿੰਡਾਂ ਦੇ ਤੀਜੇ ਜਦੇ ਆਨ ਬਸਾਉ ਫਰੀਦਿਆ ਫਰੀਦਿਆ ਲੋਕਾਂ ਨੂੰ ਦਿੱਤਾ ਬਾਤ ਬਸੋ ਭਾਈ ਤੁਸੀਂ ਅਸੀਂ ਲੋਕਾਂ ਨੂੰ ਕੀ ਹੈ ਵਿਸਤਾਰ ਦੋ ਵਿਸਤਾਰ ਦਾ ਪਰਪਸ ਕੀ ਸੀ ਕਿ ਜੜ ਤੇ ਵੀ ਫੜੇ ਵਿਚਾਰਦਾ ਰਹੇ ਘਰ ਦਾ ਵਾਂਗੇ ਜਾਣਗੇ ਬਟ ਉਹਲੇ ਪਰਪਲ ਪਰਪਲ ਪਰਪਲ ਹੋ ਰਹੀ ਸੀ ਵਿਸਾਰੋਂ ਪਰਮੇਸ਼ਰ ਦੇ ਹੁਕਮ ਦੇ ਪਾਣੀ ਧੋ ਰਿਆ ਸੀ ਪਾਣੀ ਖਤਰੇ ਵਿਸਾਰ ਕਰ ਰਹੀ ਸੀ ਉਹ ਆਪਣੇ ਵਾਸਤੇ ਨਹੀਂ ਕਰ ਰਹੀ ਬਿਸਤ ਸੀ ਮੈਂ ਪਰਮੇਸ਼ਰ ਨੇ ਸ੍ਰਿਸ਼ਟੀ ਸਾਜੀ ਇਹ ਕਾਲੇ ਵਾਸਤੇ ਸਾਜੀ ਜਿਹੜੇ ਕੰਮ ਆਤੇ ਸ੍ਰਿਸ਼ਟੀ ਸਾਜੀ ਉਹਦੇ ਵਾਸਤੇ ਵਿਸਾਰ ਕਰਦੇ ਤਾਂ ਜਨੂ ਤੁਹਾਰੇ ਲਈ ਥੇ ਜਨਮ ਤੋਂ ਵਾਰੇ ਲੈ ਕੇ ਤਾਂ ਜੋ ਤੂੰ ਕਰ ਰਹੇ ਉਹ ਜ ਮੈਂ ਕਿੰਨਾ ਹੱਥ ਫੜਾ ਸਕਦਾ ਪਾਣੇ ਨੂੰ ਸਮਝ ਕੇ ਸੱਤ ਵਿਨਾ ਦਾ ਅਸਨ ਨਹੀਂ ਬਿਠਾ ਸਕਦਾ ਕੁਝ ਬੈਕੀ ਕਰ ਸਕਦਾ ਨਾਲ ਤੇ ਹੱਥ ਫੜਾ ਸਕਦਾ ਉਹ ਵਿਸਾਰ ਤਾਂ ਉਹ ਵੀ ਹੋਊਗਾ ਸੋਨਾ ਹੀਰੇ ਜ਼ਵਾਰੂ ਨਹੀਂ ਬਣਾਏ ਨੇ ਆਪਾਂ ਨੇ ਬਣਾਏ ਉਸ ਸਵਾਲ ਇਹ ਹੈ ਕਿ ਅਪਾਕਸਤ ਹੋ ਹੀ ਗਈ ਧਰਮ ਜਿਹਦੇ ਵਿੱਚ ਉਹ ਜਿਹੜੇ ਪਰਪਸ ਬਾਤ ਤੇ ਸਿਰਸੀ ਬਣਾਈ ਹੈ ਉਸ ਬਦਦ ਮਿਲੇ ਉਪਰ ਕੋਈ ਹੱਲ ਕਰਦੀ ਨਹੀਂ ਦੁਨੀਆਂ ਨੂੰ ਗਿਆਨ ਦੇਣਾ ਪਰਮੇਸ਼ਰ ਦਾ ਮਤਲਬ ਹੈ ਜੂਬੀਏ ਧਰਮ ਧਰਮ ਰਾਜਾ ਧਰਮ ਧਰਮ ਰਾਜਾ ਇਹ ਸੇਪਾ ਬਾਇ ਇਹ ਧਰਮਸਾਲ ਬਣਾਈਏ ਸਸਤੀ ਉਹ ਇਹ ਦਾਸਵਾਲ ਨਾਨਕ ਜੀ ਨੇ ਵੀ ਬਣਾਈ ਸਮਝਿਆ ਨਾ ਬਣਵਾਈ ਇਹ ਤਾਂ ਝੋਲੇ ਨੂੰ ਧਰਮ ਦੀ ਪੜ੍ਹਾਈ ਪੜ੍ਹਾਈ ਜਾਵੇ ਉਹ ਪਟਪਟਾ ਗੁਰਬਾਣੀ ਆਈ ਤਰਤੀ ਬਾਣੀ ਆਈ ਕਿਉਂ ਆਈ ਇਹ ਕਬਰੂ ਘਾਹ ਬਧਾਇਆ ਜਾਵੇ ਜਿਹੜੇ ਖਾਂਸਾ ਬਖਸਾਜੋ ਨੂੰ ਕਿਹਾ ਪਰਮੇਸ਼ਰ ਨੇ ਕਿਹਾ ਕਿਉਂਕਿ ਉਹ ਉਹ ਉਹ ਜਿਹੜਾ ਕੰਮ ਕਿਹਾ ਉਹ ਕੰਮ ਬਿਲਕੁਲ ਕੀਤਾ ਜਾਵੇ ਜਿਹੜੀ ਉਹ ਇੱਛਾ ਸੀ ਪਰਮੇਸ਼ਰ ਦੀ ਆਪਣੀ ਇੱਛਾ ਤਾਂ ਹੋਈੋ ਨਾ ਫਿਰ ਇਹ ਵਿਸਾਰਤੈਜ ਵੀ ਹੋਗਾ ਕਲ ਵਿਸਾਰਦੀ ਉਹ ਵਿਸਾਰਤ ਵਿੱਚ ਹੱਟਾ ਮਰਜ਼ੂਗੀ ਰੋ ਰਹਿ ਵਿਸਾਰਤ ਦੇ ਵਿੱਚ ਪਰਮਾਰਥ ਹੈ ਸਵਾਰਥ ਹੈ ਫਿਰ ਆਸੇ ਦਾ ਬਾਤ ਕੀ جے ثوار دا وسار او کھا کروں گا وچھان دے پروار تھا وسار دے دلہ مزہ ہو گا آ سارا وسار پر مشرد ہے ایڈا تا سا ہو نہیں سکدا اے تے ڈرنا نہیں چاہیے دا وسار دے اے تے ڈرنا نہیں چاہیے ڈر کے ਸਵਾਰਥ ਨੂੰ ਆਬੜ ਜਦ ਪਰਮਾਰਥ ਹੁੰਦੀ ਹੈ ਪਰਮਾਰਥ ਵਿੱਚ ਅਸਰ ਉਲਟੀ ਕਰਦਾ ਬਾਹਰ ਉਲਟੀ ਕਰਦਾ ਆਪਣੇ ਅੰਦਰੋਂ ਬਹੁਤ ਨੂੰ ਕੱਢਦਾ ਹੋਰ ਕੋਈ ਖਾਲਸਾ ਤੇ ਮੇਰਾ ਖਾਤਾ ਮੈਂ ਖਾਤਾ ਵੀ ਬਰਕਰਾਰ ਰੱਖਦਾ ਸਵਾਰਥ ਉਲਟੀ ਕੀਤੀ ਹੀ ਗਲਤ ਹੈ ਸਵਾਰਥ ਉਲਟੀ ਕੀਤੀ ਗਲਤ ਤਾਂ ਉਹਨਾਂ ਦਾ ਵੀ ਫਰਕ ਹੈ ਇਹਨਾਂ ਲੋਕਾਂ ਨੇ ਪਰਮਾਰਸ਼ ਕਰਕੇ ਜ਼ਮੀਨਾਂ ਰੋਜ਼ਾਰਿਆਂ ਉਣਵਾਈਆਂ ਸਰਦਾਰਾਂ ਨੂੰ ਪੈਸੇ ਦਿੰਦੇ ਨੇ ਉਹ ਸੋ ਪਰਮਾਰਸ਼ਈ ਸੀ ਸੋ ਆਈ ਉਹਨਾਂ ਨੂੰ ਹੀ ਹਟਦੀ ਜਾਂਦੇ ਨੇ ਫਾਇਦੇ ਨੇ ਉਹ ਰਾਦੀ ਉਲਟੀ ਕੀਤੀ ਚੱਦਦੇ ਨੇ ਖੱਦਦੇ ਨੇ ਫਿਰ ਫਿਰ ਵੀ ਆਪਣੇ ਅੰਤਾਰ ਮੁਕੇ ਬੁੱਢੇ ਹੋ ਗਏ ਤੇ ਮੂਰਖ ਨੇ ਹੋ ਬਹੁਤ ਬੜੇ ਭਲੇ ਸੇ ਜੀ। ਉਪਰਾਧ ਨੇ ਆਪਣਾ ਆਪਣਾ ਤੁਹਾਨੂੰ ਰੁਗ ਮੰਦਾ ਹੋਵੇ। ਬੁੱਧੀ ਜਾਵੇ ਫਿਰ ਭਲੇ ਕੋ ਗਾਵੇ ਕਿਸੇ ਦਾ ਕੀ ਗਾਵੇ। ਪਿੰਨ ਕਹੋ ਏਕੇ ਸੋਏ। ਉੱਤੇ ਪਿੰਨ ਕੁਛ ਹੋਏ। ਉਹ ਛੱਡ ਕੇ ਉਹ ਜਿਹੜਾ ਮਾਲ ਕਿਸੇ ਸੀ ਦਾ ਹੈ ਸਾਡੀ ਦਾ। ਉਹਦੇ ਪਿੰਨੋਂ ਤੋਂ ਅੱਡ ਵਖਰਾ ਹੋ ਕੇ ਉਹਦੀ ਮਰਜ਼ੀ ਤੋਂ ਬਿਨਾ ਤਦੋ ਕੀ ਹੋ ਸਕਦਾ ਕਿਸੇ ਨੇ ਤਾਂ ਸੋਖੀ ਕੀਤਾ ਉਹਦੇ ਕੋਈ ਆਪਣਾ ਕੀਤਾ ਹੋਇਆ ਕਿਸੇ ਹੋਰ ਦਾ ਕੀਤਾ ਹੋਇਆ ਦੱਸੋ ਇਥੇ ਹੈ ਕੀ ਇਹ ਨਜ਼ਰ ਤਾਂਹੀਂ ਕਹਿਦਾ ਹੈ ਕੋਈ ਕੀਤਾ ਹੋ ਸਾਡੇ ਕੋਲ ਸਬੂਤ ਪੈਣਾ ਵੀ ਹੋਵੇ ਕਿ ਮਰਜ਼ੀ ਦੇ ਵੇਲੇ ਹੋਵੇ ਫਲਾਣੇ ਦੇ ਵੀ ਕੀਤਾ ਆ ਫਲਾਣੇ ਉਹਨੇ ਕੀਤਾ ਸ਼ਰੀਰ ਕਰਕੇ ਸਰ ਫਰਦਾਸ ਜੀ ਨੂੰ ਕਹਿਣਾ ਉਹਨੇ ਕੀਤਾ ਹੈ ਅਰੇ ਦਿਖਾ ਦਿਓ ਇਹ ਹੈ ਹਾਂਜੀ ਨਾਲ ਤੋਂ ਮੰਤਰ ਏਕੇਸ਼ ਹੋਇਆ ਹਾਂ ਤਵੰਤਰ ਏਕੇਸ਼ ਹੋਇਆ ਕੋਈ ਕੋਈ ਅਸਾਰੇ ਹਿੰਦੂਆਂ ਵਿੱਚ ਵੀ ਅਸਲ ਜੀ ਗੱਲ ਕੀ ਹੈ ਇਹ ਥੋੜਾ ਜਿਹਾ ਸਤਾਪੇ ਹੋ ਜਾਗਦੇ ਨਹੀਂ ਸਤਾਪੇ ਆ ਜਿਹੜਾ ਹੁੰਦਾ ਉਹ ਨਹੀਂ ਕੁਝ ਕਰ ਸਕਦਾ ਹਰ ਸ਼ਕਤੀ ਤਾਂ ਝੂਠੀ ਹੈ ਉਹ ਹੀ ਹੋਈ ਹੈ ਕੋਈ ਨਹੀਂ ਆ। ਪਰ ਪਿਆਉ ਸੁੱਤਾ ਜਾਗੇ ਤਾਂ ਉਹਨਾਂ ਨਾਲ ਫਤ ਬਟਾਵੇ ਆਪਣੇ ਹੀ ਬੰਦੇ। ਆਪਾਂ ਕੁਝ ਕੱਪ ਗੱਲ ਨੂੰ। ਉਹ ਕਹਿੰਦਾ ਵੀ ਸਮਝਦਾ ਨਹੀਂ ਆਉਂਦੀ। ਉਹ ਕਹੇ ਸੌਂ। ਭਾਈ ਉਹਨਾਂ ਕੰਪ ਟਿਕ ਬੈਠੀ ਤੇ ਖੜੇ ਜਾਂਦੀਆਂ ਆਪਣੇ। ਸਿਰੇ ਸੁਤੇ ਪਏ ਨੇ। ਉਹਨਾਂ ਦਾ ਕੰਪਤਾ ਉਹਨਾਂ ਨੇ ਕਰਨਾ। ਜਾਗਦੇ ਨੇ ਆਪਣੇ ਕੰਮ ਕਰਦੇ ਨੇ ਸੁੱਤੇ ਨੇ ਕੰਮ ਕਰਦੇ ਦੀ ਆਪਣਾ ਤਾਂ ਕੰਮ ਉਹਨਾਂ ਦਾ ਵੀ ਇਹ ਉਹਨੂੰ ਦੱਸਿਆ ਜਾਗਦੇ ਨੇ ਦੱਸਿਆ ਵੀ ਤੁਸੀਂ ਆ ਕੰਮ ਕਰੋ ਇਹ ਤਾਂ ਉਹ ਵੀ ਨਹੀਂ ਕਰਦੇ ਜਿਹੜਾ ਤੇ ਕੰਮ ਵਾਲਾ ਇਹਨਾਂ ਨੇ ਕਹਿੰਦਾ ਤੁਸੀਂ ਜਾਗ ਜਾਓ ਉਹ ਜਾਗਣ ਨੂੰ ਤਿਆਰ ਨਹੀਂ ਜਿਹੜਾ ਜਾਗਣ ਨੂੰ ਤਿਆਰ ਨਹੀਂ ਉਹ ਕਬੜ ਸਭੇ ਤਾਂ ਕਰੂ ਨਾ ਕਬੜ ਕੰਮ ਨਹੀਂ ਕਰਨਾ ਜਵਨੋ ਕੰਮ ਤਾਂ ਪੜਾ ਕੰਮ ਜੇਵਣਾ ਫਿਰ ਕੰਮ ਤਾਂ ਬਹੁਤ ਕੱਲਦਾ ਸੱਚ ਆ ਤੇ ਜਦੋਂ ਅਵਰ ਕੰਮ ਕਰਦਾ ਜਿਹੜਾ ਕਰਨਾ ਚਾਹੀਦਾ ਉਹ ਨਹੀਂ ਕਰਦਾ ਅਵਰ ਕਾਇ ਤੇ ਕਿਤੇ ਨਾ ਇਹ ਦੀ ਤੇਰੇ ਕੰਮ ਹੋਣੇ ਜਗਣ ਵਾਸਤੇ ਜੇ ਉਹ ਕੰਮ ਖਾਜੀ ਤੂੰ ਜਾਗਦੇ ਜਗ ਜਾਗ ਤੂੰ ਕਾਫਲ ਸੋਇਆ ਉਧਰ ਗਫਤ ਵਿੱਚ ਸੌ ਕੇ ਹੋਰ ਕੰਮ ਲੱਗੇ ਹੋਏ ਕੰਵਰਸ ਕਰਨਾ ਚਾਹੀਦਾ ਫਿਰ ਕਹਾਣਾ ਨਾ ਬੜਾ ਸਹਾਸਲਵਾਣ ਸਨੇ ਘੰਟੇ ਚਾਰ ਦਾ ਪਰਚਾ ਟਾਈਮ ਇਹ ਆਪਣਾ ਹੋਰੇ ਹੋਰ ਕੁਝ ਕਰ ਲਿਆ ਫੋਟੋ ਫੋਟ ਲਿਆ ਉਹਦੇ ਬਹੁਤ ਚੰਗੀ ਬੂਰਾ ਹੋ ਜੂ ਇੱਕੀ ਕਬਰ ਜਬ ਜਾ ਫਿਰ ਹੋ ਮੈਂ ਕਹਾਂ ਮਾਤਮਤਾ ਕਰਦੀ ਮੇਰੇ ਜੀਵਨ ਦਾ ਜੀਵਨ ਲੱਗਣੀ ਟਾਈਮ ਨਹੀਂ ਸਾਹਮਿਆ ਟਾਈਮ ਦੀ ਕੀਮਤ ਨਹੀਂ ਹੈ بے سمجھی کیتی چنتے سے کون ہے بے سمجھی دنیا دے کوئی کہندا میں بے سمجھ پتہ کرنا کہ بے سمجھے دا تو آئے گا بے سمجھے کہے اویں کہندے کرائیے سارے نو بے سمجھ کہندا کوئی تارا پوندا اے جڑا دنیا دا ਜਾਗ ਜਗਦਾ ਰਸਤਾ ਦੀ नहीं, ਦਾ ਪੇਡਾ ਚਾਲ ਹੈ ਚਲਤੇ ਸੇ ਪਛੇ ਚਲਾਂ ਕਹਿੰਦੇ ਜੇ ਮੈਂ ਜਗ ਚੱਲਦਾ ਉਹਦੇ ਪਿੱਛੇ ਪਿੱਛੇ ਚੱਲੋ ਇਹ ਜਿਹੜਾ ਨਹੀਂ ਚੱਲਦਾ ਉਹਦਾ ਹੀ ਅਸਰ ਹਾਂਜੀ ਆਪਣੇ ਚੱਲਦਾ ਆਪ ਕਰਨੇ ਹਾਰ ਕੌਤਕ ਕਰੇ ਰੰਗ ਅਪਾਰ ਆਪਣੇ ਜਦੋਂ ਤਾਂ ਆਪ ਆਪਣਾ ਚੱਲ ਤਾਂ ਆਪ ਕਰਦਾ ਕਰਦਾ ਇਹ ਜੀ ਹੋ ਨਹੀਂ ਸਕਦਾ ਤਾਂ ਇਹ ਕਦੇ ਸਕਦਾ ਬਹਾਨੇबाजी ਕਰਦਾ ਹੈ ਕਰੀ ਜਾ ਬੇਤ ਆਪ ਕਰਨੇ ਹਰ ਚਾਹੇ ਪੁੱਠਾ ਹੈ ਉਪਾਰ ਕਹੋ ਕਦੇ ਮੱਝੇ ਵਰਗੇ ਨਾ ਕਰੇ ਮੱਖੀ ਵਰਗੇ ਕਹੋ ਤਾਂ ਕਿਹਾ ਹੋਰ ਚੱਲਣਾ ਕਰਦੇ ਆਦਮੀ ਤੋਂ ਸਭ ਤੋਂ ਵੱਡਾ ਸਭ ਤੋਂ ਫਿਰ ਜੁੜਨਾ জানা ਕਰਦਾ ਫਿਰ ਹੋਰ ਬੜਿਆ ਤੱਕ ਆਏ ਕੌਤਕ ਜਾਂਦਾ ਹੋਰ ਇਹਨੇ ਕੌਤਕ ਕੀ ਕਰੀ ਜਿਹੜਾ ਜੀਵ ਹੈ ਅਗਿਆਦੀ ਹੈ ਜਿਹੜਾ ਪੂਰਨ ਬ੍ਰਹਮ ਹੈ ਉਹ ਹੋਰ ਹੈ ਜਿਹੜਾ ਸਿੱਤੇ ਰਹਿ ਜਾਣ ਵਾਲਾ ਉਹ ਹੋਰ ਹੈ ਫਿਰ ਤੇ ਪਰਫੁੱਤੀ ਆਪਣੇ ਚਰਿਤ ਆਪ ਕਰਨੇ ਹਾਰ ਕੌਤਕ ਕਰੇ ਰੰਗ ਅਵਾਰ ਜਿਹੜੇ ਆਪਣਾ ਚਲਤ ਹੈ ਉਹਦਾ ਕਰਨੇ ਹਾਰ ਆਪ ਜਿਹੜੀ ਆਪਣੀ ਸਟੋਰੀ ਹੈ ਲਿਖੀ ਹੈ ਨਾ ਡੱਬ ਉਹ ਇਹਨੇ ਆਪ ਹੀ ਵਿਖਾ ਜੋ ਆਪ ਸੋਚਦਾ ਉਹ ਆਪੇ ਕਰਦਾ ਜਿਹੜਾ ਸੁਪਨਾ ਆਪ ਦੇਖਦਾ ਨਾ ਉਸ ਆਪ ਆਪੇ ਚਲਤ ਚਿੱਤ ਸੁਪਨਾ ਆਪੇ ਰਿਹਾ ਤੁਹਾਨੂੰ ਮਨ ਲਾਇਆ ਕੌਣ ਲਾਇਆ ਤੇ ਆਪੇ ਆਪੇ ਲਾਇਆ ਇਹ ਜਿਹੜੀ ਪਲੈਨਿੰਗ ਇਹਦਾ ਸੁਪਨਾ ਹੈ ਹਰ ਕੀ ਮੂਰੇ ਇਹ ਚਲਦਾ ਆਪੇ ਰਹਿਣਾ ਆਪਣੇ ਕਲਪਨਾ ਚ ਸੁਪਨਾ ਦੇਖਦਾ ਨੂੰ ਜਿੱਤ ਗਿਆ ਵਿਚਰਦਾ ਰਹੇਗਾ ਜਦੋਂ ਵੀ ਹੋ ਜਾਗਦਾ ਰਹੇ ਵਿਚਰਦਾ ਵੀ ਹੋ ਜਾਗਾ ਉਹ ਤਰੀਏ ਜਦ ਤੱਕ ਜਿਵੇਂ ਚੱਲਦਾ ਜੱਡੀ ਦਾ ਵਿਚਰਦਾ ਵਿਚਾਰਲੇ ਮੇਰੇ ਜਿਹੜੀ ਤੋਂ ਥੋੜੇ ਜਿਹਾ ਘੱਟ ਵਾਲੇ ਵੀ ਨੇ ਜਿਆਦਾ ਘੱਟ ਵਾਲੇ ਵੀ ਜਿਆਦਾ ਬਿਲਕੁਲ ਨੈਗੇਟਿਵ ਵੀ ਐ ਪੋਜ਼ਿਟਿਵ ਵੀ ਬਹੁਤ ਸਾਰੇ ਬਿਲ ਆਪ ਕਰਨੇ ਹਾਰ ਕੋਤਕ ਰੰਗ ਅਪਾਰ ਕੋਤਕ ਕਰੇ ਰੰਗ ਆਪ ਮੰਨ ਆਪਣੇ ਮਾਹੇ ਨਾਨਕ ਕੀਤ ਕਹਿ ਨਾ ਮਨ ਮੈਂ ਆਪ ਹੈ ਅਸਰ ਵਿੱਚ ਕੀ ਜੋਤ ਹੈ ਆਹਾਂ ਜਿਹਦੇ ਵਿੱਚ ਆਹ ਹਨ ਆਪਣੇ ਵਿੱਚ ਬਹੁਤ ਇੱਕ ਬੜਾ ਘੈਰਾ ਹੈ ਟੋਟਲ ਉਹਦੇ ਵਿੱਚ ਥੋੜੇ ਜਿਹੇ ਵਾਰਕਾਲਸ ਉਹ ਮਾਨ ਹੈ ਚਾਰੇ ਪਾਸੇ ਘੈਰਾ ਜਿਹੜਾ ਪਨਪਨੀਕੀਰ ਹੈ ਉਹਦਾ ਨੂੰ ਮਾਨ ਕਾਲਸ ਵਿੱਚ ਕੀ ਹੈ ਉਹਦੇ ਵਿੱਚ ਰੋਸ਼ਨੀ ਆਪ ਮਨ ਆਪ ਆਮਾਨ ਆਪਣੇ ਮਾਣ ਹੈ ਕਾਲਸ ਦੇ ਵਿੱਚ ਕਾਲਸ ਦੇ ਵਿੱਚ ਹੀ ਆ ਪੂਰਾ ਧੈਰਾ ਦਾ ਸਾਰਾ ਹੀ ਹੈ ਉਹ ਪੂਰਾ ਹੀ ਆ ਸਾਰਾ ਵੈਸੇ ਦਾ ਏਰੀਆ ਭਾਗ ਇਹਦਾ ਪੂਰੇ ਦਾ ਪੂਰਾ ਜਿੰਨਾ ਭਾਗ ਹੈ ਉਹ ਜਿੰਨਾ ਖਾਨ ਬਣਿਆ ਹੋਇਆ ਨਾ ਵਸੀਰ ਪਰਬਤੀ ਉਹਦੇ ਵਿੱਚ ਹੀ ਆ ਮਾਨ ਆਪਣੇ ਮਾਨੇ ਮਾਨੇ ਕੋਈ ਨਹੀਂ ਜੀ ਮਾਨੇ ਦੇ ਵਿੱਚ ਹੀ ਹੋ ਜਿਦਾ ਉਹ ਉਹ ਏਰੀਆ ਦੀ ਜਗ੍ਹਾ ਦੇ ਵਿੱਚ ਹੀ ਆ ਜੇ ਤੇਰਾ ਉੱਡ ਗਿਆ ਮਾਨ ਖਤਮ ਹੋ ਗਿਆ ਪਰ ਉਹਦਾ ਪਰ ਮਹਿਮਾਨਾ ਨੇ ਦੇ ਦੇ ਕੇ ਤਾਂ ਛੋਟਾ ਹੋ ਗਿਆ ਇਹਦਾ ਬਸ ਜਿੱਦਣ ਉਹ ਨੇੜਾ ਚੱਕਿਆ ਗਿਆ ਵੱਡਾ ਬਹਾਗ ਹੋ ਗਿਆ ਵੱਡਾ ਬਹਾਗ ਹੋ ਗਿਆ ਉੱਥੇ ਬਣੇ ਸੀ ਉਹ ਏਰੀਆ ਨੇੜੇ ਦਾ ਬਣੇਗੇ ਲੈ ਮਾਨੂਪੀ ਜਲਾ ਸੀ ਨੇੜਾ ਉਹ ਇਹਦਾ ਹੀ ਹੈ ਇਹਦਾ ਹੀ ਸਰਦਾਰ ਮਾਨਾ ਪਰ ਮਾਏ ਗਾਨਕਾ ਨੇੜਾ ਸੱਜ ਤੇ ਵਿਚਈ ਹੈ ਉਗਾਂ ਨੂੰ ਬਾਅਦ ਵਿੱਚ ਨਾ ਉਥੇ ਚੱਲ ਨਾ ਉਹ ਗੁਰਬੀ ਵਿਚਰਣਗੇ ਐਵੇਂ ਆਨ ਵਿੱਚ ਰਲਦਾ ਉਹ ਉਹੀ ਹੋ ਤਰੀਕ ਨਾ ਰਲਦਾ ਜਿਹੜੇ ਇਹ ਜਿਹੜੇ ਪਰਮਕਾਰਨਾ ਪਰ ਬਾਹਰੇ ਰੰਗ ਪਰੰਪਾਰੇ ਪਰਮਕਾਰਨਾ ਜਿਆਦਾ ਠੀਕ ਹੁੰਦੀ ਹੈ ਗੱਲ ਤਾਂ ਬਾਹਲੇ ਬਾਹਰੇ ਉਹ ਨਾ ਫੁੱਟ ਗਿਆ ਉਹ ਸੁੱਤਰ ਬਾਹਰੇ ਹੋ ਗਿਆ ਦਰਵਾਹਰੇ ਕੋ ਗਿਆ ਨਾ ਪਰ ਉਹਨਾਂ ਆਟ ਕਰੀਂ ਫਿਰਦਾ ਉਹ ਪਰਮ ਦਾ ਜਿਹੜਾ ਆਂਦਾ ਹੈ ਏਹੀ ਤਾਂ ਭਗਸਾ ਦਰ ਪਰਮ ਦਾ ਆਂਦਾ ਹੈ ਭਗਸਾ ਭੂਲਾ ਗਏ ਤੇ ਸਾਬੇ ਸਾਰੀਆਂ ਜੂਤਾਂ ਪਰਮ ਦੇ ਅੰਦਰੇ ਲੈ ਰਿਹਾ ਹੈ ਦਾ ਆਂਦਾ ਤਾਂ ਕੱਲੀ ਗੋ ਨਹੀਂ ਗੱਲ ਨਹੀਂ ਹੈ ਜਿੱਥੇ ਆ ਜੂਨਾ ਰਿਆਣਾ ਹੈ ਦੇ ਅੰਦਰ ਵਿੱਚ ਦੇਹ ਬਾਲ ਨਿਕਲੇ ਕਿ ਜਿਹੜਾ ਜੂਸ ਆ ਰਿਹਾ ਨੇ ਉਹ ਪਰਫਲੇ ਅੰਡੇ ਦੇ ਵਿੱਚ ਹੀ ਦਾ ਆਂਡਾ ਪਰਫ ਨਾ ਸੋਹਣਾ ਤਾਂ ਆਂਡਾ ਫਟਣਾ ਕੋਈ ਦਾ ਆਂਡਾ ਹੀ ਆ ਆ ਨਾਲ ਦਾ ਹੀ ਆ ਭਾਗ ਸਾਗਰ ਨੂੰ ਕੁਝ ਨਹੀਂ ਹੈਗਾ ਬਾਸ ਤੇ ਜਿੰਨਾ ਭਾਗ ਸਾਗਰ ਦੇ ਵਿੱਚ ਸਾਡਾ ਭਾਗ ਸਾਗਰ ਦੇ ਵਿੱਚ ਪਰਮ ਰਹਿੰਦਾ ਸਾਡੇ ਅੰਦਰ ਬਚਿਆ ਹੋਇਆ ਉਹ ਨਾ ਕਿ ਹਿੱਸੇ ਦਾ ਨਾ ਮਾਨੇ ਉਹ ਔੜੀ ਔੜੀ ਦਾੜੋਂ ਬਰੀ ਬਰੀ ਇੱਕ ਜੀ ਲਕੀ ਰਹਿ ਜਾਣੀਆਂ ਮਾਨੇ ਪੁਰੇ ਜੀ ਬਹੁਤ ਚੱਲੋਦਾ ਫਿਰੋ ਐ ਤਰ੍ਹਾਂ ਤਾਂ ਜਹਾ ਧੋਹੀ ਪਾਸੀ ਦੇਖ ਲੈਣਾ ਇੱਧਰ ਵੀ ਚੱਲਣਾ ਇੱਧਰ ਵੀ ਕੋਈ ਅਲੋਪੇ ਹੋ ਗਿਆ ਜਿਵੇਂ ਨਹਾ ਦਾ ਪਾਣੀ ਨਹਾ ਦਾ ਪਾਣੀ ਜਮੀਨ ਉੱਤੇ ਚਾਰੇ ਹਾਂ इधर आपा दोय पासि कोई ना कोई मिट्टी लाके पक्का कच्चा जो भी है वड़ लाके पानी रोकांगे फैलन से पर जे आपा वो पानी ज्यादा बढ़ गया बटगां हटाई गए बटगां हटाई गए बटगां हटाई गए कोई ऐसी जगह आवी उधर भी ऊंची है जमीन उधर भी ऊंची है पहले ही बहुत पहाड़ा खड्डा है आवी ਫਿਰ ਉਹ ਤੇ ਆਪਾਂ ਨੂੰ ਮੱਡੀ ਲਾਉਣ ਦੇ ਰੋਲ ਰੋ ਸਦਾ ਹੀ ਹਾਦਾਂ ਵਿੱਚ ਚੱਲ ਬਈ ਹੁੰਦੇ ਪਹਾੜਾਂ ਦੇ ਵਿੱਚ ਮੈਂ ਚਾਹਦੀ ਤੂੰ ਮਰਜੀ ਵਿੱਚ ਦੋ ਪਾਸੇ ਪੂਰੀਆਂ ਛੋਟੀਆਂ ਖੜੀਆਂ ਸਰੀ ਜਾ ਸਾਰੇ ਪਹਾੜਾਂ ਦੇ ਵਿੱਚ ਵਾ ਦੀ ਮਾ ਸਾਰੇ ਜੀਆਂ ਨਹੀਂ ਮੈਂ ਤੁਹਾਨੂੰ ਜਾਊਂ ਜੇ ਤੁਹਾਨੂੰ ਜਾਇ ਦੀ ਹੈ ਇੱਕ ਦੋ ਜਿਹਾ ਆਪੇ ਚੜਾ ਦੇਣਾ ਤੇ ਤਾਂ ਨਹੀਂ ਮੈ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ। ਮਨ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਆਏ। ਹੁਣ ਦੱਸ ਕੀ ਇਹ ਵੀ ਕਹਿੰਦਾ ਮਨ ਦੇ ਵਿੱਚ ਆਪ ਸਮਝਾਓ ਕਿਵੇਂ ਸਮਝੋਗੇ। ਮਨ ਉਹਦੇ ਵਿੱਚ ਹੈ ਮਨ ਜੋ ਹੈ। ਇਸ ਕਰਕੇ ਇਹ ਗੱਲ ਸਮਝਾਈ ਦੀ ਜਾ ਸਕਦੀ। ਕੀਮਤ ਨਹੀਂ ਇਹ ਦੱਸੀ ਜਾ ਸਕਦੀ। ਇਹ ਗੱਲ ਮੁਸ਼ਕਲ ਆ ਹੁਣ ਕਥਨ ਤੇ ਪਰੇ ਚਲੀ ਗਈ ਮਨ ਮੈਂ ਆਗਾ ਮਨਾ ਪੜੇ ਤੇ ਰਾਜਲਾ ਬੁੱਧ ਦੇ ਵਿੱਚ ਅਸਲੇ ਮੰਦਾ ਆਕਾਰ ਜਿਹਨਾਂ ਟੋਟਲ ਆ ਉਹ ਵਾਹਣ ਟੋਟਲ ਭਾਗ ਦਾ ਨਾਮ ਹੋਵੇ ਟੋਟਲ ਭਾਗ ਦਾ ਨਾਮ ਨਾ ਟੋਟਲ ਭੱਜਾ ਕਰ ਮਾਨ ਹੈ ਜਿਹੜਾ ਵਾਹਣ ਉਸ ਭੱਜਾ ਦੇ ਜਿਹਦਾ ਮਾਨ ਉਹਨਾਂ ਨੂੰ ਚੋਰਾ ਬਰਬਾਦ ਕਰਦੇ ਆਪਾਂ ਸੱਚ ਗਾਂਧਿਆਰੇ ਗੁਰੂ ਬਰਬਾਦ ਉਹਨਾਂ ਨੇ ਆਪਣੇ ਬੁੱਤੇ ਅੰਦਰ ਸਿੱਸੀ ਜੱਜੀ ਉਹਦੇ ਵਿੱਚ ਸਿੱਸੀ ਰਾਜੀ ਹੋ ਬਾਹਰ ਕਿਦੇ ਸਿੱਸੀ ਜੇ ਜੇ ਵਾਸਤੇ ਹੋ ਨਾ ਆ ਵੱਡੇ ਨੇ ਮਹਨ ਛੋਟੇ ਨੇ ਹੁਕਮ ਮੈਂ ਕਹਾਂ ਨਾ ਮੈਂ ਹੁਕਮ ਤਾਂ ਚਲੋ ਹਾਂ ਹੁਕਮ ਤਾਂ ਇਸ ਜੀ ਫਲਾਣ ਦੀ ਇੱਛਾ ਹੈ ਫਲਾਣ ਦੀ ਇੱਛਾ ਹੈ ਇਸ ਇੱਛਾ ਤਾਂ ਅਬ ਜ਼ਰੂਰੀ ਹੋਰ ਤਰੀਕੇ ਨਾਲ ਮਾਤਾ ਦੂਰ ਤੱਕ ਸਪੇਸ ਹੈ ਜਿਹੜੀ ਬਣ ਹੈ ਮਾਤਾ ਵਿੱਚ ਆਪ ਸਾਹ ਕਰਦਾ ਜਿਹੜਾ ਏਰੀਆ ਹੈ ਇਹਦਾ ਉਹਦਾ ਬੁੱਜ਼ਾ ਅੰਦਰ ਸਰ ਇਹ ਆਪਣਾ ਹੀ ਮਨ ਰੋਡਾ ਹੀ ਹੈ ਮਾਂ ਦੀ ਕਹਦਾ ਘਟਵਾ ਦੇਗਾ ਜੋ ਆਪਾਂ ਵੀ ਠਿੰਡਿ ਸਾਰੇ ਕੋਣ ਕਰ ਮੈਨੇ ਕੁੱਲ ਵਾਂਡਾ ਅਰ ਜੱਤਰਾ ਤਾਰਿਖ ਕੋ ਜੇ ਦੋ ਘਟਵਾ ਦੇ ਕੇ ਸੇ ਦੋ ਪਾਇਆ ਬ੍ਰੁਖਾ ਦੀ ਕੇ ਮਾਨਪੁਰਗਾਚਾ ਜੇਤਾਰ ਉਪਰ ਮਾਨ 14 ਬਿਓ ਉਟਾਈਆ ਤੇ ਬੁੱਧੀ ਘਟ ਬੱਧ ਗਈ ਜਗਦੀ ਰਤੀ ਦਾ ਤਫੰਗ ਹੈ ਤੇ ਜਗਦੀ ਰੱਬ ਦਾ ਉਹ ਤਾਂ ਕੋਈ ਜਾਗਦੀ ਰਹੀ ਜਾਂਦੀ ਹੈ ਜਾਗਦੀ ਹੈ ਉਹਦੇ ਵਜਨ ਉਹਦੇ ਸ਼ੱਕ ਸੁੱਤੇ ਦੀ ਸ਼ਕਤੀ ਘਟ ਜਾਂਦੀ ਹੈ ਇਸ ਵੀਚ ਆਪਣੀ ਸ਼ਕਤੀ ਰਹਿੰਦੀ ਰੇ ਤੱਕ ਜਿਹੜਾ ਜਾਗਦਾ ਹੈ ਸ਼ਕਤੀ ਵੱਧ ਜਾਂਦੀ